ਸ਼ਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫੁਰੇ ਤਪੱਸਦ ਆਵੇ ਸਾਨੂੰ ਸਾਰੀ ਝੂਠ ਦੀ ਮਾਇਆ ਖਾਤਰ ਫਿਰਦਾ ਕਹਿੰਦਾ ਮੈਂ ਤਪਾ ਕਾ ਨੂੰ ਹੈ ਪਰ ਸਬ ਭੂਲਾ ਸਭ ਤੀਰਥ ਗਹੈ ਉਹ ਤਪਾ ਕੈਸੇ ਪਰਮ ਗਤ ਉਹ ਪਰਮਦੇਵ ਚ ਭੁੱਲੇ ਆਦਾ ਸਾ ਤੀਰ ਸੰਦੇ ਫਰੀਜ ਹੁੰਦਾ ਇੱਥੇ ਆਹ ਹੋ ਜੂ ਇੱਥੇ ਜੀ ਕਪਾਲ ਮੋਚਨ ਜਿਵੇਂ ਜਿਦਾ ਹੋ ਤਲੰਕ ਲੈ ਗਿਆ ਸੀ ਉਹਨੇ ਬੱਚੇ ਨੇ ਦੱਸਿਆ ਸੀ ਵੀ ਇੱਥੇ ਕਲੰਕ ਲੈ ਜਾਂਦਾ ਉਹਦਾ ਦਾ ਤੇ ਡਾਕਟਰ ਵੀ ਇਹ ਜਾਂਦਾ ਥਾਣੀ ਬਣਾ ਕੇ ਤੀਰ ਤਰਾਈ ਰਹੇ ਨੇ ਨਾ ਤੇ ਜਾ ਕੇ ਆਹ ਹੋ ਜੂ ਫਿਰਨੇ ਤੋਂ ਜਾ ਕੇ ਆਹ ਹੋ ਜੂ ਪਰ ਇਹ ਪਰਮਗਤ ਕਿਵੇਂ ਪਾ ਲੈਣੀ ਇਹ ਦੇ ਪਰਮ ਵਿੱਚ ਭੁੱਲੇ ਫਰੀਜ ਨੇ ਨਾ ਵੇ ਇਹ ਸਾਡੇ ਕਾਫਲੇ ਜਿਹੜਾ ਸਰੀਰ ਦੇ ਨਾਲ ਤਨ ਤੇ ਮਨ ਨਾਲ ਤੇ تیرਦ ਕਰੀ ਜਾਂਦਾ ਕੋਈ ਸੁਣਦਾ ਹੀ ਨਹੀਂ ਕਿਸੇ। ਕਹਿੰਦੇ ਨੇ ਜਿਹੜਾ ਭਗਤ ਸੁਣਦਾ। ਇਹ ਤਾਂ Hindu ਜਾਂ ਹੋਰ ਧਰਮ ਦੇ ਲੋਕ ਕਰਦੇ ਸੀ ਹੁਣ ਤਾਂ ਸਿੱਖ ਵੀ ਇਹੀ ਕੰਮ ਕਰਦੇ ਹੋ ਜਾਣਗੇ ਫਿਰ ਤਾਂ ਕਰਦੇ ਕਹੇ ਹੀ ਨਹੀਂ ਗੁਰ ਪ੍ਰਸਾਦੀ ਕੋ ਨਾ ਨਿਕ ਸੋਤਾਪਾ ਮੁਖੰਤਰ ਪਾਵੇ ਆ ਦੇਖ ਜਿਹੜਾ ਗੁਰ ਪ੍ਰਸਾਦ ਦੀ ਕੋ ਸੱਚ ਦੀ ਕਮਾਈ ਕਰੂ ਸਿੱਖਤਾ ਹੋਇ ਇਹ ਹੋਂ ਮੈਂ ਇਹਦੀ ਨਾ ਨੰਦਾ ਤਾਂ ਹੀ ਕਿ ਮੈਂ ਇਹਨੂੰ ਛੱਡ ਰਾ ਜਦੋ ਉਹ ਜਮਨ ਸਾਡਾ ਗੁਰੂ ਕਿਵੇਂ ਬਣ ਜੂਗਾ ਜਿਹਨਾਂ ਜਰਸੀ ਉਹਦੀ ਗੱਲ ਨਹੀਂ ਬੰਦੇ ਜਿੰਨਾ ਜੇ ਰਾਮਨ ਨੂੰ ਭਰੋਸੇ ਦੇ ਵਿੱਚ ਨਹੀਂ ਲੈ ਥੰਦੇ ਸਾਡੇ ਤੇ ਭਰੋਸਾ ਹੀ ਨਹੀਂ ਸਾਡੀ ਜਵਾਬ ਦੇਊਗਾ ਕਿ ਲੋੜ ਹੈ ਉਸ ਕਰੂਗਾ ਜੋ ਸੱਤੀ ਹੋਊ ਹਾਂਜੀ ਮੁਕਤੀ ਤਾਂ ਮਿਲਣੀ ਮੁਕਤੀ ਬਾਹਰੋਂ ਨਹੀਂ ਮਿਲਣੀ ਠੀਕ ਹੈ ਇਹ ਤਪਾਂ ਨੂੰ ਹੀ ਹਾਂ ਇਹ ਜੀ ਜੀਵੇ ਤਪ ਠੀਕ ਹੈ ਹਾਂ ਜੀ ਮਹੱਲਾ ਤੀਜਾ ਸੋ ਤਪਾ ਜੇ ਇਹ ਤਪ ਘਾਲੇ ਸਤਿਗੁਰ ਨੂੰ ਮਿਲੇ ਸ਼ਬਦ ਸਮਾਲੇ ਤਬਾਦ ਕਿਵੇਂ ਹੁੰਦਾ ਕਹੇ ਜਾਂਦਾ ਕੋ ਹੁੰਦਾ ਜਿਹੜੇ ਅੱਗ ਧੋਣੇ ਆ ਤਾਪਦੇ ਨੇ ਤਾਂ ਫਿਰ ਨਹੀਂ ਹੁੰਦੇ ਤੇ ਤੁੱਪੇ ਖੜੇ ਨੇ ਉਹ ਤੁੱਪੇ ਨਹੀਂ ਹੁੰਦੇ ਸਤਿਗੁਰ ਦਾ ਜਿਹੜਾ ਤਾ ਪਹਿਗੋ ਮਨ ਨੂੰ ਪਵੰਦ ਕਰਨ ਵਾਲਾ ਬੰਦਾ ਸੋਈ ਰਹਿ ਬਿਚੀ ਬੰਦੀ ਪਵੰਦ ਰਹੇ ਗੁਰਵਾਨ ਦਾ ਇਹ ਤਾ ਦਾ ਬਚਨ ਮੰਨਦੇ ਮਨ ਨੂੰ ਕਹਿ ਵੀ ਮੰਨਣਾ ਪਊਗਾ ਉਹ ਤਾ ਤਾ ਕੀ ਬੜੇ ਬੜੇ 무ਨੀ ਦੇਵਤੇ ਕਈ ਯੁੱਗ ਜਿਨੀ ਤਨ ਤਾ ਕਿੰਨੇ ਨਾਲ ਤੁਸੀਂ ਕਹਿੰਦੇ ਹੋ ਕਈ ਯੁੱਗ ਅਸਰੀਰ ਤੋਂ ਤਪਉਂਦੇ ਰਹਨੇ ਅੰਗ ਫੇਰ ਨਹੀਂ ਪਾਇਆ ਕੀ ਫਾਇਦਾ ਹੋਇਆ ਵੀ ਕਈ ਯੁੱਗ ਸਰੀਰ ਤੋਂ ਤਪਉਂਦਾ ਉਹਨਾਂ ਦਾ ਉਹਨਾਂ ਦੀ ਗੱਲ ਉਹਨਾਂ ਦੇ ਕਰਕੇ ਤੁਹਾਡਾ ਹੀ ਲਿਖਿਆ ਹੋਇਆ ਉਹ ਗੱਲ ਉਹ ਤਾਂ ਕਰਨੀ ਬਣੀ ਉਹਨਾਂ ਦੀ ਹਾਂਜੀ ਸਤਿਗੁਰ ਕੀ ਸੇਵਾ ਸੋ ਤਪਾ ਦਰਗਾਹ ਪਾਵੇ ਮਾਣ ਦਰਗਾਹ ਦੇ ਵਿੱਚ ਮੈਂ ਪਾਉਣ ਖਤਰ ਦੀ ਜਿਹੜੀ ਸੇਵਾ ਹੈ ਉਹ ਹੀ ਤਪਾ ਸੇਵਾ ਸਫਲ ਹੈ ਜੇ ਕੋ ਕਰੇ ਗੁਰਬਾਣੀ ਦੇ ਵਿਚਾਰ ਹੈ ਗੁਰਸਿੱਖੀ ਸੇਵਾ ਸ਼ਬਦ ਵਿਚਾਰ ਸ਼ਬਦ ਵਿਚਾਰ ਕਰੂਗਾ ਉਹ ਅੰਤਰਾਤਮਾ ਦੀ ਖਰਾਸਤ ਅੰਤਰਾਤਮਾ ਸਾਡੀ ਕੋਰੇ ਗੁਰਦੇ ਦੀ ਖਰਾਸਤ ਉਹਦੀ ਸੇਵਾ ਇਹ ਹੀ ਹੈ ਕਿ ਗੁਰਬਾਨੀ ਨੂੰ ਸਮਝ ਕੇ ਉਹਨੂੰ ਛਪੀਸ਼ਾਲੀ ਸ਼ਕਤੀ ਉਹਨੂੰ ਮਿਲਦੀ ਹੈ ਉਹ ਤੋਂ ਮਨ ਨੂੰ ਨਹੀਂ ਸ਼ਕਤੀ ਮਿਲਦੀ ਗੁਰਬਾਨੀ ਦਾ ਮਨ ਨੂੰ ਕੋਈ ਨਹੀਂ ਯੋਗਤੀ ਇਹ ਤੇ ਕਰਕੇ ਨਹੀਂ ਨਾ ਮਨ ਮੰਨਦਾ ਬਾਲਾ ਕਮਜ਼ੋਰ ਹੁੰਦਾ ਹੈ ਨੂੰ ਮੰਨਣ ਤੇ ਮਨ ਦਾ ਵਿਰੋਧੀ ਜਿਹੜਾ ਦੁਆ ਹੈ ਚਿੱਤ ਆ ਉਹ ਤਕੜਾ ਹੁੰਦਾ ਹੁਣ ਆਪਣੇ ਵਿਰੋਧੀ ਨੂੰ ਤਕੜਾ ਕੌਣ ਕਰਨਾ ਚਾਹੁੰਦੇ ਕੋਈ ਵੀ ਨਹੀਂ ਚਾਹੁੰਦਾ ਮੇਰੇ ਵੇਖਣ ਤੱਕੜਾ ਹੋਵੇ ਮੈਥੋਂ ਮਨ ਤਾਂ ਨਹੀਂ ਮੰਦਾ ਗੁਰਮਾਨ ਨੂੰ ਮਨ ਕਮਜ਼ੋਰ ਹੁੰਦਾ ਸੋ ਤਪ ਦਰਗਹ ਪਾਵੇ ਮਾਨ ਹੋਰ ਕਿਰਤੋਂ ਮਾਨ ਤਾਂ ਹੀ ਪਾਊਗਾ ਹੌਡੀ ਰਾਤ ਦਿਨ ਸੁਪਾਇਨ ਕੀ ਵਰਤਨ ਗੁਰਮਤਿ ਘਟ ਚਾਨਣ ਹਨੇਰ વિનાਸ਼ਣ ਰਾਤ ਦਿਨ ਚਾਨਣ ਇਹ ਤਾਂ ਸੰਸਾਰ ਦੇ ਕੰਮਕਾਰ ਵਾਸਤੇ ਬਾਹਰ ਜਾਣ ਉਹ ਬਾਹਰ ਤੁਸੀਂ ਜੋਤ ਜਗਾਤੀ ਨਾ ਬਾਹਰ ਬਾਹਰ ਲਈ ਜੋਤੀ ਲੈ ਜੋਤ ਅੰਦਰ ਦੀ ਹੈ ਬਾਹਰ ਜਾਣ ਜੇ ਦਾ ਦੀਵਾ ਬਣਾ ਕੇ ਦਿਖਾਓਗੇ ਉਹਦੇ ਦਰਸ਼ਨ ਖਾਣਾ ਤਰਾ ਕੇ ਦਿਖਾਓ ਕੋਈ ਫਿਰ ਉਹ ਜੀ ਬਣਾ ਲਾਗੇ ਉਹ ਜਿਹੜੀ ਜੋਤ ਤੁਸੀਂ ਦਰਸ਼ਨ ਕਰਾਉਂਦੇ ਹੋ ਕਰਾਈ ਜਾਂਦੇ ਨੇ ਹੁਣ ਵੀ ਉਹ ਤਾਂ ਅੱਖਾਂ ਨੂੰ ਵੀ ਨਹੀਂ ਆ ਫਿਰ ਅੱਖਾਂ ਨਹੀਂ ਚੀਦੀਆਂ ਮਾਰਿਆ ਜੋ ਦੀਸੇ ਤੋਂ ਮਾਇਆ ਜੋੜ ਦਾ ਫੇਰ ਮਾਇਆ ਨਾਲ ਇਹ ਤਾਂ ਆ ਕੁਛ ਥੰਗੀ ਫੇਰ ਚਲਦੀ ਏ ਨਾਲੇ ਕਹੀ ਜਾਂਦੇ ਨੇ ਅੱਖਾਂ ਨੂੰ ਵੀ ਨਾਲੇ ਅੱਖਾਂ ਨਾਲੇ ਵਰਤਿਓਂ ਕਰੀ ਜਾਂਦੇ ਹਾਂ ਜੀ ਗੁਰਮਤਿ ਘਟ ਗੁਰਬਾਣੀ ਦਾ ਗਿਆਨ ਹੈ ਨਾਲ ਜਾਣਾ ਹੁਣ ਗਿਆਨ ਦਾ ਦੀਵਾ ਅੰਦਰ ਜਗਾਣਾ ਚਾਨਣ ਹੋਣਾ ਗੁਰਬਿੰਦ ਕੋ ਹੰਦਾਰ ਗਿਆਨ ਤੇ ਬਿਨਾਂ ਅਧਾਰ ਪਰਮ ਪਰਮਾ ਦੇਹ ਹੈ ਪਰਮ ਦੂਰ ਹੋ ਚਾਨਣ ਹੋ ਹਾਂਜੀ ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਣ ਤ੍ਰਣ ਸਭ ਕੁਛ ਆਪੇ ਆਪ ਹੈ ਸਦਾ ਹਰਪਣ ਹੁਣ ਜਿਹੜਾ ਦੇ ਵਿੱਚ ਜੋ ਵੀ ਹੋਈ ਹੈ ਜੀਵ ਰੇਖ ਦੇ ਵਿੱਚ ਜਿਹੜਾ ਹੈ ਪ੍ਰਭ ਨਾਲੇ ਬੋਲਿਆ ਹੋਇਆ ਹਰਪਰ ਉਹ ਹੁਕਮ ਦੇ ਨਾਲੇ ਦੀ ਸਭ ਇਹ ਸੱਚ ਹੈ ਪਰ ਉਹ ਬ੍ਰਹਮ ਵਿਨੋਦਾਂ ਦੇ ਉੱਗੜੁੰਦੇ ਨੇ ਕਹੀ ਜਾਂਦੇ ਨੇ ਮੰਦੇ ਹਨ ਬਾਹਰ ਜਿਹੜਾ ਹੈ ਸਾਜਿਆ ਹੋਇਆ ਇਹ ਹੁਕਮ ਦੇਣਾ ਹੈ ਸਾਜਿਆ ਸਾਰਾ ਸਾਰੀਆਂ ਜੁਨਾ ਦੇ ਵਿੱਚ ਇਹ ਹੁਕਮ ਦਾ ਸਾਜਿਆ ਹੁਕਮ ਹੈ ਪਸ਼ੂ ਪੰਛੀ ਬਿਰਖ ਅਸਥਵਰ ਸਾਰੀਆਂ ਜੁਨਾ ਚ ਮੈਂ ਪਰਮੂਲਾ ਹੈ ਹੁਕਮ ਦੇ ਵਿੱਚ ਆ ਜਦੋਂ ਕੋਣ ਤੋਂ ਆਕੀ ਹੁੰਦਾ ਹੈ ਜਿਹੜੇ ਜਨਮ ਚ ਆ ਕੇ ਉਹ ਰੁੱਖਾ ਜਨਮ ਫੇੜੇਗਾ ਫਿਰ ਜਿੰਨਾ ਜਿਹੜੇ ਹੁਕਮ ਤੋਂ ਆਕੀ ਨਹੀਂ ਹੋਏ ਇਹ ਜਨਮ ਦੇ ਵਿੱਚ ਹੁਕਮ ਤੋਂ ਆਕੀ ਨਾ ਹੋਈਏ ਬਸ ਬਾਹਰ ਕਿਛੁ ਨਾ ਜੋਨਾ ਪੌੜੀ ਜਿੰਨੀ ਆਖਣੇ ਹਾਂ ਉਹ ਰਹਿ ਕੇ ਚੜੇ ਹਨ ਇੱਥੇ ਆਪੇ ਆਪ ਤੋ ਆਕੀ ਹੋ ਜਾਂਦਾ ਸੋ ਸਹੀ ਬਿਮਾਰੀ ਹੁਕਮ ਦੇ ਚੱਲੇ ਗੱਲ ਖਤਮ ਹਾਂਜੀ ਸਭ ਕੁਛ ਆਪੇ ਆਪ ਹੈ ਸਦਾ ਹਰਪਣ ਉਹ ਗੁਰਮੁਖ ਹੀ ਇਹ ਕਹਿੰਦਾ ਆਇਆ ਗੁਰਮੁਖ ਦਾ ਹਮੇਸ਼ਾ ਹੀ ਇਹ ਹੀ ਜਿੰਨੇ ਵੀ ਗੁਰਮਖੋੜੇ ਨੇ ਜਦ ਵੀ ਹੋਏ ਨੇ ਉਹਨਾਂ ਨੇ ਕਹਿਆ ਸਭ ਕੁਛ ਆਪੇ ਆਪ ਹੁਕਮ ਨਹੀਂ ਸਭ ਕੁਛ ਕੀਤਾ ਆਦਮੀ ਤਾਂ ਕੁਛ ਵੀ ਨਹੀਂ ਕਰ ਸਕਦਾ ਇਹ ਕਿਰਪਾ ਵੀ ਹੁਣ ਗੁਰੂ ਨਾਨਕ ਦੇਵ ਜੀ ਕਬੀਰ ਨੇ ਕਿਹਾ ਸ਼ੁਰੂ ਤੇ ਇਹੀ ਕਹਿੰਦੇ ਐ ਨਾ ਗੁਰੂ ਦਾ ਫਿਰ ਵੀ ਇਹੀ ਕਹਿੰਦੇ ਸੱਚ ਤਾਂ ਹਮੇਸ਼ਾ ਇੱਕੋ ਹੀ ਰਹਣਾ ਪਾਲ ਤਿੰਨੇ ਹੋ ਜਾਣ ਸੱਚ ਸੱਚੇ ਆ ਹਾਂਜੀ ਪਈ ਸੱਚੇ ਆਪ 부ਝਾਈ ਜੇ ਤੋ ਸੋਜੀ ਪਈ ਆ ਸਭ ਨੂੰ ਜਦੋਂ ਵੀ ਕੋਈ ਸੋਜੀ ਪਈ ਆ ਕਿਸੇ ਨੂੰ ਜਦੋਂ ਵੀ ਕੋਈ ਘਟਕਤ ਪੈਦਾ ਹੋਇਆ ਚਾਹੇ ਕਬੀਰ ਤੋਂ ਪਹਿਲਾਂ ਹੋਏ ਨੇ ਧਰੂ ਪ੍ਰਣਾਲਾ ਹੋਏ ਨੇ ਉਹ ਤੁਹਾਨੂੰ ਲਾ ਕੇ ਜਿੰਨੀ ਵੀ ਲਿਸਟ ਉਨਤਈ ਆਈ ਸੋ ਜੀ ਦਰਗਾਹ ਹੈ ਮਰੀ ਹੈ ਕਿ ਤੋੜੀ ਅਸਰ ਨੂੰ ਸਾੰਨੇ ਇਹ ਜੀ ਆਪੇ ਇਸ ਕਬਲਾਏ ਬੋਲਦੇ ਕਿਸੇ ਨੇ ਨਹੀਂ ਜਾਇਗਾ ਦਾਸ ਘਾਰੇ ਗੁਰੂ ਦੀ ਬਾਣੀ ਕਹੀ ਉਹਨਾਂ ਬਾਣੀ ਦਾ ਗਾਉ ਗੁਰੂ ਕਿਹੜੀ ਬਾਣੀਆ ਸਿਰ ਬਾਣੀ ਵੀ ਆਪਣੀ ਨਹੀਂ ਬਾਣੀ ਕਹਾਂ ਸਤਗੁਰੂ ਆਵਸ਼ਕ ਸਤਗੁਰੂ ਕੇ ਪਿਆਰੇਓ ਗਾਉ ਸੱਚੀ ਬਾਣੀ ਇਹ ਤਾਂ ਕਹਿਤਾ ਵੀ ਸੱਚੀ ਬਾਣੀ ਗਾਉ ਪਰ ਇਹ ਬਾਣੀ ਮੇਰੀ ਨਹੀਂ ਕਿ ਬਾਣੀ ਦਾ ਗਾਉ ਗੁਰੂ ਕਿਹੜੀ ਪਰ ਮੇਛਰ ਦੀ ਬਾਣੀ ਹੈ ਕਿਤਾਬੇ ਲਾਇਗੋ ਨਹੀਂ ਆ। ਅਸਲੀ ਉਸੇ ਹੈ ਜਨਾ। ਸ਼ਬਦੇ ਹੀ ਸੋਜੀ ਪਈ ਸੱਚੇ ਆ ਬੁਝਾਈ। ਇਸੇ ਸ਼ਬਦ ਤੋਂ ਬਣਾ ਪੰਨਾ ਤੋਂ ਸਾਇੰਸ ਦੀ ਹੈ ਕਿਸੇ ਵੀ ਚੀਜ਼ ਦੀ ਹੈ ਸਭ ਨੂੰ ਅੰਦਰੋਂ ਸੋਜੀ ਹੋਈ ਹੋਈ ਹੈ। ਖੋਜੀ ਨੇ ਉਹਨਾਂ ਨੂੰ ਅੰਦਰੋਂ ਸੋਜੀ ਹੋਈ ਹੈ। ਜੇ ਅੰਦਰੋਂ ਸੋਜੀ ਨਾ ਹੋਵੇ ਗਿਆਨ ਵਜੇ ਨਹੀਂ ਸਾਰਾ ਸੰਸਾਰ ਦਾ ਵਧੂਗਾ? ਹਾਂਜੀ। ਠੀਕ ਹੈ ਜੀ। ਇੱਥੇ ਪੰਜਵੀਂ ਪੌੜੀ ਦੀ ਸਮਾਪਤੀ ਹੈ ਜੀ